गौरी की वार महल्ला चौथा एक ओंकार सतगुरु श्लोक महल्ला चौथा सतगुरु पुरुष दयाल है जिस नु सब कोई एक दृष्ट कर देखदा मन भावनी ते सिद्ध होई हां जी दयाल है मेरी तो वाला है सतगुरु पुरुष ਦੇয়াল। ਨਾਲ ਉੱਪਰ ਇਹ ਦੇয়াল ਹੈ। ਜੋ ਥਾਣੀ দৃষ্টি ਨੂੰ ਹੈ ਚੋਗ ਹੈ। ਐਸਾ ਉਹ ਦੇਸ ਤੇ ਇਹਨਾਂ ਥਾਣੀ দৃষ্টি ਸੁਖੀ ਹੁੰਦੇ ਨੇ। ਇਹਨਾਂ ਤੇ ਰਹਿ ਕੇ ਐਸਾ ਉਹ ਦੇਸ ਨੇ ਮਾਪਾ ਬਣਾਉਂਦਾ ਕੋ ਧਰਿਆ ਹੋਇਆ ਹੈ। ਉਸ ਜਰੂਰ ਤਾਰਨ ਦਾ ਉਪਦੇਸ਼ ਕਰੇ ਇਸ ਕਰਕੇ ਕਿ ਤਰਾਂ ਦੇ ਆਉਂਦੇ ਜਿਸ ਨੂੰ ਸਖੰਕ ਖਬ ਕਰ ਪਰ ਉਹਨ ਉਸਾਰੇ ਸੁਭਾਅ ਬੇਸਮਤਰ ਨੂੰ ਤਾਰ ਦੇਣ ਦੀ ਬਤ ਹੈ ਉਹਦੇ ਕੋਲ ਤਾਰ ਦੇ ਦਿੱਤੀ ਬਿਲਕੁਲ ਫਸਟਾ ਜੀ ਕੋਲ ਨਾਲ ਇਹ ਜੀ ਦਾ ਉਹ ਨਾ ਹੋਵੇ ਤਾਂ ਦੀ ਵਿਜਾਇ ਡੋਵੇ ਸਵੇ ਕਿਆ ਦੂਰਾ ਤਾਰੇ ਤਾਰੇ ਸੁਮਤੀ ਹਦੂ ਦੇਸ ਸਮਾਨ ਦਾ ਬਾਗਾਂ ਕਰ ਤੋਂ ਪਹਾਲ ਲੈ ਜਾਣ ਵਾਲੀ ਬੱਤ ਲੋਕਾਂ ਕੋਲ ਰੂਕੀ ਪਰ ਸਭ ਤੋਂ ਸੇਸ਼ ਬੱਤੇ ਰੂਕ ਲੋਕਾਂ ਨਾਲ ਅੱਧੀ ਬੱਚੀ ਰੋਰੀ ਬਦੂਰੀ ਹੂੰ ਇਹਦੇ ਕੋਲ ਪੂਰੀ ਬ ਇੱਕ ਦ੍ਰਿਸ਼ਟੀ ਕਾ ਦੇਖਦਾ ਮਨ ਭਾਵਨੀ ਤੇ ਸਿੱਧੀ ਹੋਈ ਇਹਦੇ ਦ੍ਰਿਸ਼ਟੀ ਦਾ ਦੇਖਦਾ ਇਹ ਜਿੰਦੇ ਲੋਕਾਂ ਨਾਲ ਸੰਵਾਦ ਦੇ ਆਦਿ ਦੀ ਗੱਲ ਹੈ ਆਦਿ ਦੀ ਦੀ ਉਹ ਕਿਹਾ ਦੀ ਭਾਸ਼ਾ ਚ ਨੂੰ ਦੇਖ ਰਿਹਾ ਰਿਹਾ ਚੰਦ ਦੀ ਭਾਸ਼ਾ ਚ ਚੰਦ ਨੂੰ ਸੁਣਿਆ ਰਿਹਾ ਗੁਰੂ ਪਰਮੇਸ਼ਰ ਹਰ ਦਾਤਾ ਚਾਹੇ ਕੋਈ ਇਹ ਦਾ ਦੁੱਧ ਹੈ ਚਾਹੇ ਕੋਈ ਇਹ ਰੁਤੀ ਹੈ ਚਾਹੇ ਕੋਈ ਇਹ ਧੰਬਾ ਬੁਲਦਾ ਹੈ ਚਾਹੇ ਕੋਈ ਘੜਾ ਬੁਲਦਾ ਇਹ ਸਾਰਿਆਂ ਨੂੰ ਕੋ ਦ੍ਰਿਸ਼ਟੀ ਨੂੰ ਆਪਣਾ ਮ스터 ਹੁੰਦੇ ਹੋਏ ਹੈ ਮ스터 ਹੁੰਦੇ ਹਾਂ ਨਾ ਕੋਈ ਵਾਸਤੇ ਬ੍ਰੇਸ ਦ੍ਰਿਸ਼ਟੀ ਦਾ ਦੇਖਦਾ ਸਾਰਿਆਂ ਨੂੰ ਕੋ ਦ੍ਰਿਸ਼ਟੀ ਇਹਦਾ ਕੋਈ ਬੈਠੀ ਬਗਾਨਾ ਨਹੀਂ ਹੈ ਲੋਕ ਇਹਨੂੰ ਬੈਰੀ ਬਗਾਨਾ ਮੰਨਦੇ ਮਨ ਆਵੇ ਸਮਝ ਹੈ ਜੀ ਨਾ ਕਰਦੇ ਬੰਨਣਾ ਇਹ ਨਹੀਂ ਬੰਨ ਸਕਦਾ ਮਨ ਭਾਵਨੀ ਤੇ ਸਿੱਧੀ ਹੋਈ ਮਨ ਭਾਵ ਜੇ ਕਿਸੇ ਦੇ ਮਨ ਦੇ ਵਿੱਚ ਇੱਛਾ ਹੈ ਭਾਵ ਤਾਂ ਦਰਸਤੀ ਤਾਂ ਉਹ ਸਰਫਲ ਹੋ ਆਦਮੀ ਆਪਣੀ ਇੱਛਾ ਨੂੰ ਆਪਣੀ ਭਾਵਨਾ ਨੂੰ ਜੇ ਉਹਦੇ ਆਪਣੇ ਮਨ ਦੇ ਵਿੱਚ ਭਾਵਨਾ ਹੈ ਨਾ ਤਤਕੁਰ ਦੇ ਬਟੇਰੂ ਨੂੰ ਬੁਝੁਰਦੀ ਬੁਝਾਈ ਚਰਨ ਦੀ ਠੀਕ ਹੈ ਕਾਰੇ ਤੋਂ ਉਹ ਤੋਂ ਪਹਾੜਾਂ ਤੱਕ ਹੋ ਵੀ ਡਰੂਗਾ ਪਰ ਠਾਕੁਰ ਸਭ ਤੋਂ ਵੱਧ ਖਰੀ ਹੈ ਕਹਿੰਦੀ ਮਨ ਭਾਵਨੀ ਕਿਹਦੇ ਵਾਸਤੇ ਕਿਹਾ ਵੀ ਜੇ ਆਪਣੇ ਜਿਹੜਾ ਬੰਦਾ ਭਗਤ ਪਾਵਨ ਰੂਪ ਹੈ ਉਹ ਗੁਰਦੇਸਪ੍ਰਤੀ ਉਹਨਾਂ ਰੋਣਾ ਦਾ ਚਿੱਤੀ ਹੁਣ ਪ੍ਰਾਪਤ ਠੀਕ ਹੈ ਸਿੱਧੀ ਤੋਂ ਪਾਵਨ ਜੀ ਸਿੱਧੀ ਤੋਂ ਪਾਵਨ ਜੇ ਤੋੜ ਗੁਰਨਾਮ ਤਾਂ ਵੀ ਹੋਣੀ ਬਖਸਾ ਦਾ ਕਰਦੀ ਸਮਝ ਆਉਣੀ ਹੈ ਠੀਕ ਹੈ ਪਵ ਸਾਹਿਬ ਦਾਰਮ ਇਨਸਾਨ ਦਾ ਜੀਵਨ ਬਣ ਜਾਵੇ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ उत्तम हर पद सोए नानक कृपा ते हर ढाई है गुरुमुख पावे कोई सतगुरु बेटे अमृत सतगुरु दे तन बेटे आपे अमृत अमृत भावी सतगुरु दे स्तर ऊपर चढ़ती है क्या अमृत सतगुरु दे बेटे कोई ऐसा पद भी है भी पानीदा के ऊपर चढ़ता 요가 ਠੀਕ ਹੈ ਜੀ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖੀ ਪਾਵੇ ਕੋਈ ਤੁਹਾਨੂੰ ਨੰਨ ਕਿਰਪਾ ਹੋਵੇ ਪਰਮੇਸ਼ਰ ਦੀ ਤਾਂ ਹਰ ਦੇ ਵਿੱਚ ਧਿਆਨ ਲਗੇ ਭਾਰ ਜਿੱਕੇ ਤੇ ਹੋਵੇ ਨੁਕਤਾ ਨਾਲ ਜੁੜੇ ਕੋਈ ਐਸੀ ਹਸਤ ਕੋਲ ਠੀਕ ਹੈ ਜੀ ਮਹੱਲਾ ਚੌਥਾ ਹਉਮੈ ਮਾਇਆ ਸਬ ਵਿਖ ਹੈ ਨਿਤ ਜਗ ਟੂਟਾ ਸੰਸਾਰ ਲਾਹਾ ਹਰ ਧਨ ਖਟਿਆ ਗੁਰਮੁਖੀ ਸ਼ਬਦ ਵਿਚਾਰ ਹਉਮੈ ਭਾਇਆ ਇਹ ਸਭ go real easy ਠੀਕ ਹੈ ਜੀ ਮੈਲ ਦੇਖ ਉਤਰੈ ਹਰ ਅੰਮ੍ਰਿਤ ਹਰ ਉਲਤਾਰ ਸਭ ਕਾਰਜ ਤਿੰਨ ਕੇ ਸਿਧ ਹੈ ਜਿਨ ਗੁਰਮੁਖੀ ਕਿਰਪਾ ਧਾਰ ਹੋਵੇ ਮੈਲ ਦੇਖ ਉਤਰੈ ਰੂਪੇ ਜਾਂਦੀ ਹੈ ਸ਼ਬਦ ਵਿਚਾਰ ਨਾਲ ਬਚਿਆ ਨਾ ਚਾਹੁੰਦਾ ਬਚਾਰ ਜੀ ਨੇ ਖੱਡ ਲਿਆ ਆ ਤੁਹਾਨੂੰ ਹਾਂਜੀ ਉਹਨਾਂ ਦੇ ਉਮਰੇ ਦਾ ਆ ਉੱਤਰ ਜਾਂਦੀ ਤੇ ਘਿਆਰ ਉੱਤਰ ਜਾਂਦੀ ਹਰ ਉਮਰ ਤੋਂ ਹਰ ਉਮਰ ਤੋਂ ਉਹਨਾਂ ਨੇ ਹਰ ਉਮਰ ਤੋਂ ਹਰਦੇ ਵਿੱਚ ਕੰਮ ਕਰ ਲਿਆ ਸ਼ਾਂਤੀ ਆ ਠੀਕ ਹੈ ਜੀ ਹਰ ਦੇ ਗੁਣ ਜਿਹੜੇ ਹਨ ਧਾਰਨੇ ਹਨ ਜੀ ਹਿੱਡੇ ਵਿੱਚ ਹਾਂ ਉਹਦੇ ਕੋਲ ਤਾਂ ਠੀਕ ਹੈ ਜੀ ਸਭ ਕਾਰਜ ਤਿੰਨ ਕੇ ਸਿੱਧ ਹੈ ਜਿਨ ਗੁਰੂ ਕੀ ਕਿਰਪਾ ਧਾਰ ਸਭ ਕਾਰਜ ਤਿੰਨ ਕੇ ਸਦੇ ਉਹਦੇ ਸਾਰੇ ਕਾਰਜ ਇਸੇ ਹੋ ਜਾਂਦੇ ਨੇ ਇਹ ਗੁਰਮੁਖੀ ਕਿਰਪਾ ਧਾਰ ਜਿਹਨਾਂ ਤੇ ਗੁਰਮੁਖੀ ਕਿਰਪਾ ਹੋ ਗਈ ਗੁਰੂ ਕਿਰਪਾ ਕੀ ਹੁੰਦੀ ਹੈ ਉਹ ਬੇਦੇ ਰੂਪਨ ਹੋਰ ਵਰਤੂ ਕਿਰਪਾ ਧਾਰ ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਜਾਂਦੇ ਉਹਨਾਂ ਦੇ ਅਰਕਾਂ ਦੀ ਹੁੰਦੀ ਆ ਜਾਂਦੀ ਹੈ। ਪਹਿਲਾਂ ਤੇ ਆਤੀ ਪਾਛੇ ਜਲ ਵਸ ਠੀਕ ਹੈ ਜੀ, ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ। ਅਪਲ ਗੋੜਾ ਬਿਲੇ ਰਹੇ ਉਹੀ ਬਿਲੇ ਰਹੇ ਸ੍ਰੀ ਖੇਤਮ ਤੋਂ ਬਾਦ ਸੁਨਕ ਜੋ ਮਿਲੇ ਸੋ ਬਿਲੇ ਰਹੇ ਜੋ ਤੁਰ ਮਿਲੇ ਸੇ ਮਿਲ ਰਹੇ ਹਾਂ ਥੋੜਾ ਤੋਰਮ ਰਹੇ ਅਪਲ ਦੇ ਮਿਲੇ ਨੇ ਅਪਲ ਨਾਮ ਬਣਾਏ ਜੇ ਤੋਂ ਆਪੇ ਇਹ ਹੋਰ ਯੋ ਅਸਬਹ ਇਹ ਰਕਮ ਹਾਰ ਹੈ ਇਹ ਤਾਂ ਅਜੇ ਤਾਂ ਆਇਆ ਨਾ ਸਰਜਨ ਹਾਰਾ ਕਿ ਸਰਜਨ 2000 ਰੁਪਏ ਹੁੰਦਾ ਬੂਰ ਸਰਜਨ ਹਾਰ ਹੈ ਜੋ કુલ 30 ਤੋਂ ਹੁੰਦੀ ਹੈ ਹੰਤੀ ਉਸ ਤੱਕ ਹੈ ਸਰਜਨ ਤੋਂ ਪੈਦਾ ਹੋਇਆ ਹੋਈ ਜੋਤ जनाते पौडी तू सच्चा साहिब सच सच्च है सच सच्च, सच्चा गोसाई तुदनो सब ध्याय दी सब लगै तेरी पाँय ਇਹ ਮੂਲ ਨੂੰ जा ਜਾ जी? ਜੀ ਮੂਲ ਨੂੰ ਅੱਛਾ ਜੀ ਉਹਨਾਂ ਨੂੰ ਕਿਹਾ ਜਾ ਰਿਹਾ ਉਹ ਤਾਂ ਬਾਰ ਬਾਰ ਬਲ ਬਲ ਕਰਦਾ ਠੀਕ ਹੈ ਜੀ ਸੱਚਾ ਸਹਾਰੂ ਸੱਚਾ ਸੱਚਾ ਬੋਲ ਸੱਚਾ ਮਾਨਤਾ ਨੂੰ ਬੋਲਦਾ ਸੁਤ ਦਾ ਬਾਲ ਤੂਰੇ ਬੋਤ ਦਾ ਬਾਲ ਤੂਰੇ ਤੁਦਨੋ ਸਭ ਧਿਆਈ ਦੀ ਸਭ ਲੱਗੇ ਤੇਰੀ ਪੰ ਕਦੋਂ ਮੁਸਲਮਾਨ ਹੋ ਗਏ ਹਨ ਕਿ ਜੀ ਜੀ ਰਹਿਣ ਨਾਲ ਸਾਡੀ ਤੇਰੇ ਵੱਲ ਧਿਆਨ ਦੇਖ ਦੀਆ ਤੇਰੀ ਭੈ ਕੇ ਭੈ ਬਿਚ ਬਹੁਤ ਚਲੇਣ ਤੋਂ ਬਹੁਤ ਭੈ ਬਿਚ ਚੱਲਣ ਲੱਗਦੇ ਪਰ ਇਹ ਹੁਣ ਸੱਚਾ ਸਾਹਿਬ ਸੱਚ ਹੈ ਪਰਮੇਸ਼ਰ ਵਾਸਤੇ ਫਿਰ ਆਪਾਂ ਤਰਲੀ ਸਪਸ਼ਟ ਕੀ ਇਹ ਮੂਲ ਵਾਸਤੇ ਕਿਹਾ ਗਿਆ ਪਰ ਅੱਛਾ ਜੇ ਬੋਲੇ ਜੇ ਨਾ ਬੋਲੇ ਤਾਂ ਇਹ ਹੁਕਮਾਂ ਦੇ ਵਿੱਚ ਬਹੁਤ ਹੈ ਸਾਵੇਂ ਪਰਮੇਸ਼ਰ ਹੈ ਜੇ ਬੋਲੇ ਸਾਵੇਂ ਪਰਮੇਸ਼ਰ ਹੈ ਜੇ ਆਦਮੀ ਬੋਲਿਆ ਵੀ ਹੁਕਮਤ ਹੈ ਫਿਰ ਘੜਾਉਂਦੀ ਤਾਕਤ ਘਟ ਗਈ ਬਿਆਨ ਮੈ ਜੋ ਦਿੱਤਾ ਨਹੀਂ ਹੁਕਮ ਸੁਣਾਇਆ ਨਹੀਂ ਜੱਜ ਨੇ ਫਿਰ ਘੜਾਉਂਦੀ ਤਾਕਤ ਘਟ ਗਈ ਹੁਕਮ ਸੁਣਾਉਣ ਦਾ ਸਮਝਣਾ ਦਰਦ ਵੱਧ ਗਿਆ ਕੋਈ ਤੈ ਹੋ ਸਕਦੇ ਅਛਾ ਤੁਹਾਨੂੰ ਕਿਹਦਾ ਗੱਲ ਤੇ ਹੁੰਦੀ ਹੈ ਬੋਦ ਹੂੰ ਇਹ ਤਾਂ ਬਵੇਕ ਬੁੱਧੀ ਬੋਲੂਗੀ ਇਸ ਅਵਸਥਾ ਵਿੱਚ ਠੀਕ ਹੈ ਇਹ ਤੁਲਕੀ ਬਾਣੀ ਜਿਹੜੀ ਹੈ ਤੁਲਕੀ ਬਾਣੀ ਇਸ ਅਵਸਥਾ ਚ ਰਚੀ ਗਈ ਹੈ ਗੁਰੂਕ੍ਰਿਪ ਬੋਲੀ ਹੈ ਇਹ ਤਾਂ ਬਵੇਕ ਬੁੱਧੀ ਨਹੀਂ ਦਸੀ ਗੱਲ ਹੈ ਕਿ ਤਰਮਨ ਦਾ ਇਸ ਸਾਚਾ ਹੈ ਤਰਮਨ ਕਹੇ ਹੈ ਜਿਹੜਾ ਹਰ ਕੁਰੀਆ ਲੈ ਫਿਰ ਉਹ ਦੋ ਰੁਸਤੇ ਅੱਛਾ ਤੇ ਜਬਦੇ ਕੋਈ ਬਰਮਾ ਘੋਵੇ ਘਰਮੁਗਾਸ ਰਿਆ ਦੇ ਰੂਪ ਚ ਹੁੰਦੀ ਹੈ ਓਏ ਭੇਡ ਖੋਲ ਹੁੰਦੀ ਸੱਚ ਨਾਲ ਨੂੰ ਹਰ ਦਾ ਕੀ ਜੀ ਗਈ ਪਾਈ ਤੋਂ ਭਾਵ ਇੱਥੇ ਕੀ ਹੈ ਕਿਉਂਕਿ ਪਰਮੇਸ਼ਰ ਦਾ ਤਾਂ ਕੋਈ ਰੂਪ ਨਾ ਦੇਖਣਾ ਰੰਗੇ ਬੜਾ ਭਲੇਖਾ ਸਾਨੂੰ ਕਿ ਗੁਰਕੇ ਕੀ ਭਾਵ ਬਣਦਾ ਸੋਚ ਸੋਚ ਹੈ ਪੂਰੀ ਪੈਣ ਚ ਰੱਖ ਰਹੇ ਠੀਕ ਹਾਂ ਪਾਣੀ ਕਿਹਦਾ ਹਾਂਜੀ ਠੀਕ ਹੈ ਤੇਰੀ ਸਿਫਤ ਸਵਾਲੀਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਜਿਸ ਜਿਹਾ ਤੇਰਾ ਸਰੂਪ ਜੀ ਦੇ ਹੈ ਤੇਰਾ ਸਰੂਪ ਹੈ ਠੀਕ ਹੈ ਜੀ ਗੁਰਮੁਖਾਂ ਨੂੰ ਫਲ ਪਾਏ ਦਾ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਜਿਹੜੇ ਬਰਮੁਖਾਂ ਚ ਸਤਿਨਾਮ ਸੁਣਾਇ ਸਤਿਨਾਮ ਸੁਣਾਇ ਸਮਾਇ ਕਉਂ ਦੇ ਸਤਿਨਾਮ ਨੂੰ ਤੇ ਸੁਭਾਇ ਲੈ ਦੇਖ ਜਿਵੇਂ ਤੂੰ ਬੁਲਾਉਣਾ ਉਹ ਜੋ ਬੋਲਦੇ ਨੇ ਉਹੀ ਫੜਾ ਹੈ ਜਦ ਸਤਿਨਾਮ ਨੂੰ ਬੋਲ ਕੇ ਸਰੋਦੇ ਉਹੀ ਤਫੜਾ ਹੈ ਹੋਰ ਵਰਤੀ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵੱਡੀ ਦੀ